ਬਾਰ ਬ੍ਰਹਮ ਕੇ ਸਗਲੇ ਠਾਓ ਜਿਹਦੇ ਜਿਹਦੇ ਇਹਦੇ ਕਰ ਰਾਖੇ ਤੈ ਸਾਤ ਦਿਨੋਂ ਨਾ ਆ ਦੇਖ ਆ ਇਥੋ ਤੇ ਨਹੀਂ ਇੱਕ ਵੇਲੇ ਲਿਆ ਬਾਰ ਬ੍ਰਹਮ ਕੇ ਸਗਲੇ ਠਾਓ ਉਹ ਗੱਲ ਜਿਹੜੀ ਮੈਂ ਕਿਹਾ ਸੀ ਆ ਜਿਵੇਂ ਸਲੋਕ ਦਾ ਬੁੱਧਾ ਆ ਹੈ ਜੋ ਹੈ ਨਾ ਉਸ ਬੁੱਧਾ ਮੁਦਾ ਅਗਲੇ ਸ਼ਲੋਕ ਦਾ ਬੁੱਧਾ ਆ। ਇਹ ਅਗਲੇ ਸ਼ਲੋਕ ਹੁੰਦੇ। ਆਗਲਾ ਸ਼ਲੋਕ ਹੁੰਦਾ। ਪਾਰ ਬ੍ਰਹਮ ਕੇ ਸਦਰੇ ਖਾਉ। ਸਾਰੇ ਹਿਰਦੇ ਵਿੱਚ ਪਾਰ ਬ੍ਰਹਮ ਚਾਹੇ ਆਦਮੀ ਨਾ ਨਹੀਂ ਸਾਰੀ ਤਰ੍ਹਾਂ ਸੀਦਾ ਫਿਦੂ। ਸਦਰੇ। ਆਇਆ। ਦਵੇ ਆਇਆ। ਹਾਂ। ਥਾਉ ਤਾਂ ਬਲੋ ਹਿਰਦਾ ਹੁੰਦਾ। ਚਾਇਬ ਰਛਾ ਨੇ ਵਿਚਾ ਮناسبਤੀ ਹੈ ਅੱਟਾ ਜੇ ਜੇਰੇ ਜੇ ਸੇਤਾ ਜੋ ਕੁਝ ਦੇ ਦੇ ਵਿੱਚ ਜਿੰਨਾ ਵੀ ਹੈ ਤੇ ਵੀ ਚੇਤਨ ਬੱਧਾ ਉਹ ਸਾਰੇ ਹੀ ਘਰ ਉਹਦੇ ਦੀ ਸਾਰਾ ਰਿਹਾ ਜੇ ਕੋਈ ਕਰ ਰਿਹਾ ਉੱਤੇ ਨੂੰ ਉਹ ਗੁਰੂ ਦੀ ਹੈ ਪਈ ਪੂਰਨ ਪਰਮ ਤਾਂ ਭਣਣ ਨੂੰ ਪੂਰਨ ਪਰਮ ਸਾਰੇ ਹੀ ਨੇ ਆ ਬੈਠੇ ਉਹ ਨਹੀਂ ਆ ਰਹੇ ਉਹਨਾਂ ਦੀ ਇੱਛਾ ਆ ਰਹੀ ਹੈ ਉਹਨਾਂ ਦੀ ਇੱਛਾ ਸ਼ਕਤੀ ਹੈ ਧਾਰਿਆਂ ਦੇ ਵਿਚਾਰੇ ਉਹ ਤਾਂ ਹਾਜ਼ਰ ਇੱਛਾ ਸ਼ਕਤੀ ਧਾਰਿਆਂ ਨੂੰ ਕੰਮ ਕਰਦੀ ਹੈ ਉੱਤਰ ਨੂੰ ਖਿੱਚ ਲੂ ਸਾਨੂੰ ਆਪਣੇ ਕੋਲ ਲਿਜਾਣ ਨੂੰ ਸਾਰਿਆਂ ਦੇ ਹਵਲੇ ਤੂੰ ਪਰ ਸਾਡਾ ਮਨ ਵਿਰੋਧ ਕਰ ਰਿਹਾ ਜੇ ਉਹ ਵਿਗਨ ਪਾ ਰਿਹਾ ਜੇ ਸਾਡਾ ਮਨ ਵਿਰੋਧ ਕਰ ਰਿਹਾ ਉਹ ਵਿਗਨ ਪਾ ਰਿਹਾ ਬੜਾ ਗੋੜਾ ਹੋਈ ਤਾਂ ਮਾਰ ਰਿਹਾ ਉਹ ਗੋੜਾ ਮਾਰ ਸਾਡੇ ਪੈਰ ਨੂੰ ਪਾਈਆ ਦੱਸੀ ਖਿੱਚ ਲੂ ਜਦ ਖਿੱਚਿਆ ਤਾਂ ਜਾਈਏ ਉਹਨੇ ਗੋੜਾ ਮਾਰ ਕੇ ਰਸੀ ਵਰਦਾ ਜੇ ਤੁ ਗਿਆਨੀ ਜਨਤਾ ਪਰ ਸਕੀ ਹੱਥ ਜਨਤਾ ਉਹ ਸਕਿਆ ਹੱਥ ਨਹੀਂ ਜੇ ਅਮਰਗੋੜਾ ਨੂੰ ਚੱਲਣਾ ਹੈ ਤੇਰ ਨੂੰ ਚੱਲਣਾ ਉਹ ਬਾਹਰ ਤੋਂ ਕੋਹਰਾ ਵੀ ਉਹ ਤੋਂ ਲੇਖ ਬਾਹਰੋਂ ਜਾਣੇ ਨਾ ਬਾਹਰੋਂ ਕਹਿੰਦੇ ਨੇ ਮਾਇਆ ਵੱਲੋਂ ਧਿਆਨ ਅੰਦਰੋਂ ਜਾਣੇ ਸੋਤਰੋਂ ਅੰਦਰ ਵੱਡਦਾ ਸੋਤਰੋਂ ਪੱਟਦਾ ਤੋੜਦਾ ਵੇਖਣੇ ਜਾਣਾ ਕਰਦੇ ਗ੍ਰੋਥ ਸਾਡਾ ਮਨ ਆਪਣਾ ਕਰ ਰਿਹਾ ਹੈ ਪਰਮੇਸ਼ਰ ਗ੍ਰੋਥ ਵੀ ਕਰਦਾ ਉਹਦਾ ਤਾਂ ਪ੍ਰੋਗਰਾਮ ਹੀ ਸਾਰਾ ਆਪਣੇ ਵੱਲ ਇਹ ਕਰਕੇ ਅਸੀਂ ਕਹਿਦੇ ਹਾਂ ਕਿ ਜੋ ਉਹ ਕਰ ਰਿਹਾ ਹੈ ਇਸ ਤੇ ਹੋਇਆ ਨਹੀਂ ਕੁਝ ਉਹ ਬੁਰਾ ਨਹੀਂ ਹੋ ਅਗਲੀ ਵਿਝਾਰਦਾ ਔਰ ਇੱਕ ਹੋਰ ਕਹਿੰਦਾ ਸੰਸਾਰ ਦਾ ਹੋਰ ਕਹਿੰਦਾ ਨਾ ਕੀਤਾ ਨਹੀਂ ਅਗਰ ਦिवे ਨਾਲੇ ਕੀਤੇ ਨਾ ਇਹ ਨਹੀਂ ਕੀਤੇ ਨਾ ਸਵਾਲ ਆਉਂ ਇਹ ਦੁਆ ਖਾ ਪਰ ਰਹੀ ਹੈ। ਪ੍ਰਸਾਦ ਪੈ ਰਹੀ ਹੈ। ਉਹ ਕਿੰਨੀ ਚੀਜ਼ ਹੈ। ਉਹ ਕੀ ਕਹੇ ਤਾਂ। ਸਵਾਲ ਆ ਵੀ ਉਹਦੇ ਗੌਰ ਨੇ ਕਿ ਸਰ। ਵਾਲੀਆਂ ਹੋ। ਹੋਈਆ। ਹੈ। ਕਿਹੜੇ ਕਾਮਲੇ ਕਿਹਦੇ? ਕਾਲਡ ਦੱਸੋ? ਕਿਹੋ। ਆਪਰੇ ਨੱਥਿਆ ਕੋ। ਸਵਾਲ ਇਹ ਹੋਰ ਹੈ ਕਿ ਸਾਜਬੇ ਤਾਂ ਸਾਫੀ ਜ਼ਬੀ ਰੂਹੀ ਕੱਢ ਰਿਹਾ ਮੈਂ ਤਾਂ ਕੱਢ ਹੋ ਰਿਹਾ ਥੋੜਾ ਕਿਵੇਂ ਹੋ ਰਿਹਾ ਉਹ ਤੇ ਦਾ ਬੁਰਾ ਹੋ ਜਿਹਾ ਸਿਰ ਜਿੱਦਣ ਕੌਣ ਪਾ ਰਿਹਾ ਜੋ ਬੁਰਾ ਹੋ ਰਿਹਾ ਥੋੜਾ ਉਹ ਗੱਲ ਉਹ ਤੇ ਦਾ ਹੰਕਾਰ ਉਹ ਮਨੋਂ ਮਨੋਂ ਉਹਦਾ ਹੰਕਾਰ ਮਨ ਵਿੱਚ ਹੈ ਕਿਤੇ ਵਿੱਚ ਹੈ ਅਵਲ ਵਿੱਚ ਹੈ ਜਾਂ ਜੀ ਵਿੱਚ ਹੈ ਹੰਕਾਰ ਹੈ ਇਹ ਬ੍ਰੋਗ ਦਾ ਇਹਦਾ ਹੀ ਇਥੇ ਜੂ ਲੱਗਿਆ ਹੈ ਅਸੀਂ ਜਾਨ ਨਾਲ ਹੀ ਤੋਂ ਲੈ ਦਾ ਖਜ਼ੂਰ ਨਹੀਂ ਜਾਣ ਵਾਲਾ ਨੂੰ ਜ਼ਰੂਰ ਹੈ ਲਿਜਾਂਗਾ ਤੁਰਤੀ ਬਾਣੀ ਆਈ ਹੈ ਤਾਂ ਫਸਲਿਕੇ ਤੋਂ ਉਡਾਈ ਜੋ ਕੁਟੇ ਡਿੜਕੇ ਹੈ ਵਿੱਚ ਇੰਟਰੈਲੋ ਐਸੇ ਲੱਗਦੇ ਜੀ ਯਾ ਕਾ ਵੀਰ ਇਹ ਦੇਵ ਜੀ ਬੋਕਲ ਨਹੀਂ ਹੋਈ ਬਈ ਕਿਸਦੀ ਜਦੋਂ ਬੈਠਦੀ ਹੁੰਦੀ ਕਿ ਕਦਾ ਦਾ ਸੁਣਤੀ ਹੈ ਕੋਈ ਤੇ ਕਿਹਦੀ ਹੈ ਕੋਈ ਨਹੀਂ ਕਿ ਕਦਿਆ ਮਾਨੇ ਮੰਨਦਾ ਆ ਦੇਖੋ ਤਾਂ ਕਿ ਕਦਿਆ ਮਾਨੇ ਮੰਨਦਾ ਉਹ ਵੀ ਮੰਨਦਾ ਉਹਦਾ ਜੇ ਤੁਹਾਨੂੰ ਅਸਲ ਰਹਿਣਾ ਹੈ ਅਧਿਕਾਤ ਸੱਜਣਾ ਹੈ ਰਹੋ ਕਦਮ ਵਾਲਾ ਕਦਮ ਪਿਆਰ ਆ ਜਿਹੜਾ ਸੜਦਾ ਵਿੱਚੋਂ ਕਹਿੰਦਾ ਮੈਂ ਨਿਕਲਣਾ ਫਿਰ ਹੋਇਆ ਔਰ ਇਹ ਕਹੋ ਨਾ ਕਿ ਕਰਾ ਤੇਰੀਆਂ ਆਪੇ ਇਹ ਫਿਰ ਸਹਰਪੋੜਾ ਆਇਆ ਨੋਮਨ ਅਸਲਮ ਜੇ ਸਿਆ ਤੇ ਇਸੇ ਸਿਆ ਆਇਆ ਔਰ ਸਵਾਲ ਇਹ ਆ ਜਵਾਬ ਤਾਂ ਸਾਡੇ ਕੋਲ ਹੈਗਾ ਸਵਾਲ ਉਹ ਹੈ ਹੋ ਰਿਹਾ ਜੀ ਤਾਂ ਬੁਰੇ ਦੀ ਗੱਲ ਨਹੀਂ ਕੀਤੀ ਉਹ ਸਮਝਣ ਵਾਲੀ ਗੱਲ ਵਿੱਚ ਹਾਂ ਇਹਨਾਂ ਨੇ ਹੋਰ ਕਿਹਨੇ ਕੁਝ ਕਰਾ ਬੁਰਾ ਤਾਂ ਹੈਗਾ ਫਿਰ ਫਾਈਟਾ ਬੁਰੇ ਦਾ ਬੁਰਾ ਨੂੰ ਹੋ ਰਿਹਾ ਹੋ ਕੌਣ ਕਰਦਾ ਬੁਰਾ ਹੋ ਰਿਹਾ ਜਿਹਦੀ وجہ ਕਿਉਂ ਹੋ ਰਹੀ ਹੈ ਸਭ ਕੁਝ ਤੇ ਸਾਰੇ ਸ਼ੈਤਾਨ ਦਾ ਅਵਤਾਰ ਦੇ ਰਹਿਣ ਵਾਲੇ ਲੋਕ ਸ਼ੈਤਾਨ ਕੋਈ ਸ਼ੈਤਾਨ ਉਂਗਲੀ ਜੂਏ ਭਲੂ ਕਰਦਾ ਹੈ ਆਪਣੇ ਆਪ ਨੂੰ ਕਾਬੂ ਨਹੀਂ ਕਰਨਾ ਮੈਨੂੰ ਸ਼ੈਤਾਨ ਨੂੰ ਕਿ ਆਪਣੇ ਅੰਦਰੋਂ ਸ਼ੈਤਾਨ ਲੱਭ ਲਵੇ ਕੰਦਸਾਂ ਬੜ ਜੁਦਾ ਆਪਣੇ ਸ਼ੈਤਾਨ ਦਾ ਰਾਜ ਕਰ ਲੋ ਬਗਾਨ ਸ਼ੈਤਾਨ ਤੁਹਾਨੂੰ ਕੁਝ ਨਹੀਂ ਕਰ ਸਕੋ ਦੁਨੀਆ ਦੇ ਵਿੱਚ ਆਪਣੇ ਅੰਦਰ ਵਾਲੇ ਸ਼ੈਤਾਨ ਨੂੰ ਕਾਬੂ ਕਰ ਲੀਏ ਕੱਲ੍ਹ ਜੀ ਨੇ ਬਾਹਰਲਾ ਸ਼ੈਤਾਨ ਨੂੰ ਕੁਝ ਨਹੀਂ ਕਰ ਸਕਦਾ ਬਾਹਰਲਾ ਸ਼ੈਤਾਨ ਨੂੰ ਸਿਰਕਤੀ ਤਬੀ ਤੇ ਹੀ ਵਿਹਾਲਦਾ ਹੋਰ ਕੀ ਕਰਦਾ ਹੋਰ ਵੀ ਕਰਦਾ ਬਾਲਾ ਜੇ ਤਾਬੂ ਨੂੰ ਹੱਥ ਹੀ ਨਹੀਂ ਚੜ ਸਕਦਾ ਹੋ ਤੋ ਕੁਝ ਨਹੀਂ ਕਰ ਸਕਦਾ ਬਾਲਾ ਜੇ ਤਾਬੂ ਤਾਂ ਅਬਦੁੱਲਾਹ ਜਿਹੜਾ ਉਹਦਾ ਰਾਜ ਕਰੋ ਉਹਦਾ ਗੁਜ਼ਰਦਾ ਫੈਦਾਨ ਕਦੇ ਮੁੰਡਾਈ ਨਹੀਂ ਮਰਦਾ ਹੈ ਜਗਦਾ ਇਸ ਗੱਲ ਦਾ ਕੋਈ ਬੰਨਣ ਨੂੰ ਤਿਆਰ ਨਹੀਂ ਨੂੰ ਕਹਤਾਂ ਮੈਂ ਖਾਂ ਥੋੜਾ ਚਾਹਤਾਂ ਚਾਹਦਾ ਇਨਸਾਨ ਵੀ ਅਦੂਰ ਗੱਲੇ ਨਹੀਂ ਸੁਣਦਾ ਆ ਗੱਲ ਸ਼ੈਤਾਨ ਦੀ ਗੱਲ ਸੁਣਦੀ ਐ ਨਿਸਾਨ ਦੀ ਗੱਲ ਨਹੀਂ ਸੁਣਦੀ ਉਹ ਤਾਂ ਦਾਸੂਰ ਹੈ ਸਾਜੰਦਾ ਪਰ ਸ਼ੈਤਾਨ ਇਹਦੀ ਗੱਲ ਸੁਣਦੀ ਐ ਨਿਸਾਨ ਵਾਲਾ ਜੇਤ ਉਹਦੀ ਗੱਲ ਵੀ ਨਹੀਂ ਸੁਣਦੀ ਅੰਤਰਾਸਬੰਦੀ ਗੱਲ ਹੀ ਸੁਣਦੀ ਐ ਇੱਥੇ ਹੀ ਖੜੀਆ ਗੱਲ ਸੰਸਾਰ ਸਾਡੇ ਦੀ ਜੇ ਅੰਤਰਾਦੋਂ ਇਹ ਵਾਜ ਸੁਣੇ ਸੰਦੇ ਵਾਜ ਜਿਹੜੀ ਖੋਪੜੀ ਦੇ ਵਿੱਚ ਆਵਾਜ਼ ਆਉਂਦੀ ਐ ਦੇਖ ਕੇ ਉਹ ਸ਼ੈਤਾਨ ਦੀ ਆਵਾਜ਼ ਐ ਪਰ ਜਦ ਖੋਪੜੀ ਨੂੰ ਦਸ ਹਜ਼ਾਰ ਬਣ ਲਿਆ ਸ਼ੈਤਾਨ ਦਾ ਧਰਮ ਆ ਗਿਆ। ਸਮਾਗ ਲੈ ਵੀ ਜਿਹਨਾਂ ਦਾ ਦਸ ਹਜ਼ਾਰ ਸਭ ਸ਼ੈਤਾਨ ਦੇ ਹੋਰ ਗੱਲਾਂ ਸ਼ੈਤਾਨ। ਕਿਤੇ ਤਾਂ ਵਸੇ ਜਾਂਦਾ ਨਾ ਸ਼ੈਤਾਨ ਦਾ ਚਰਖਾ ਕਹਿੰਦੇ ਹੀ ਨੇ। ਜਿਹੜੇ ਦਸ ਹਜ਼ਾਰ ਹੋਤੀ ਸਭ ਸ਼ੈਤਾਨ ਜਿਹੜੇ ਦਸ ਹਜ਼ਾਰ ਦਾ ਪ੍ਰਚਾਰ ਦਿਮਾਗ ਕਰਦੇ ਨੇ। ਗੁਰਬਾਨੇ ਤਾਂ ਦਿਲ ਚ ਮੰਗੀਏ ਮਤਲਬ ਕੋਈ ਦਿਲ ਆਨੋ ਦਿਲ ਚ ਮੰਗੀਏ ਦਿਮਾਗ ਨੂੰ ਅਸੀਂ ਆਪਣੇ ਬਰਤੀਨਾ ਵਰਤਣਾ ਹੈ ਦਿਲ ਨੂੰ ਨਹੀਂ ਤੁਸੀਂ ਆਪਣੀ ਬਰਤੀਨਾ ਵਰਤ ਸਕਦੇ ਉਹ ਦਿਲ ਦੇ ਵਿੱਚ ਮਟਾਇਆ ਸਾਫ ਤੇਲ ਵਰਤੂਗਾ ਇਨਸਾਨ ਦਿਲ ਦਾ ਕਬਜ਼ਾ ਇਨਸਾਨ ਕੋਲ ਹੈ ਦਿਮਾਗ ਦਾ ਕਬਜ਼ਾ ਸ਼ੈਤਾਨ ਕੋਲ ਆਡ ਡਾਟ ਕਬਜ਼ੇ ਦਾ ਲਗਭਗ ਦੇਪ ਤੋਂ ਰਜੀਲੇ ਸਾਜੁਰ ਸਾਰੀ એનર્ਜੀ ਦਿਲ ਤੋਂ ਆਉਂਦੀ ਹੈ ਦਿਮਾਗ ਦੇ ਵਿੱਚ ਸਰੀਰ ਦੇ ਵਿੱਚ ਵਰਤਦਾ ਇਹਨੂੰ ਸ਼ੈਤਾਨ ਹੈ ਵਰਤਦਾ ਕੌਣ ਹੈ ਸ਼ੈਤਾਨ ਸ਼ੈਤਾਨ ਆਪਣੇ ਪਰਪਜ ਵਾਸਤੇ ਆਪਣੇ ਮਰਜੀ ਅਨਸਾਰ ਦਿਮਾਗ ਨੂੰ ਅਰ ਸਰੀਰ ਨੂੰ ਵਰਤਦਾ ਆਪਣੀ ਇੱਛਾ ਅਨਸਾਰ ਵਰਤਦਾ ਸ਼ੈਤਾਨ ਦਦਕੇ ਧਰਤੀਏ ਸਾਧ ਕੀ ਸਗਲੀ ਧਰਤੀ ਸਾਧ ਕੀ ਉਹ ਸਾਰਾ ਸ਼ਰੀਰ ਦਾ ਸਾਧ ਦਾ ਸਾਭੀ ਲੈ ਰਿਆ ਹਾਠ ਨੂੰ ਪਪੇ ਨੂੰ ਵੀ ਕੱਢ ਲਿਆ ਰੋਟੀ ਵੀ ਅੰਨ ਤਾਂ ਲਿਆ ਸਾਰਾ ਚੀਜ ਉਹਦੀ ਹੈ ਕਬਜਾ ਸਰੀਰ है, ਹੈ ਸ਼ੈਤਾਨ ਤਾਸਕਰ ਸ਼ੈਤਾਨ ਨੂੰ ਕਹੇ ਸਗਲੀ ਧਰਤੀ ਸਾਧ ਕੀ ਸਾਰਾ ਸ਼ਰੀਰ ਅਸਥੋਦਾ ਜੇ ਸਾ ਲੈਣਾ ਚਾਹਦੇ ਇਹਨਾਂ ਤੇ ਫਤਵਾ ਸਾਰੋ ਗਿਆ ਜਲਾਕੇ ਦਿਖਾ ਦੇ ਜਲਾਦੂ ਜੇ ਜਿੰਤਾ ਬੈ ਜਾਦੀ ਹੈ ਫਿਰ ਆ ਦੇ ਬੈ ਜਾਂਦੀ ਹੈ ਰੋਟੀ ਖਾ ਲੂ ਅੱਜ ਖਾ ਲੂਗਾ ਨਾਲ ਅੰਦਰ ਕਰਕੇ ਦੋਖ ਆਪਣੇ ਵਰਦੀ ਨਾਲ ਤਾਂ ਸਾਹਮਣੇ ਇਹ ਚੀਜ਼ ਖਾਏ ਦੀ ਸਕਦਾ ਹੈ ਜੇ ਅੱਲ੍ਹਾ ਐਕਸੈਪਟ ਕਰੂ ਤਾਂ ਹੱਦਾ ਹੈ ਕਈ ਵਾਰ ਦੇਖੋ ਮੂਜੀ ਜੰਮੀ ਰਿਹਾ ਜਾਂ ਨਖਮੂੜੇ ਸਮੈ ਲਾਉਂਦੀ ਉਹ ਦਾਦਾ ਇਹ ਕਹਿੰਦਾ ਖਾਣਾ ਲੈ ਨਹੀਂ ਖਾਣੀ ਗਏ ਉਹ ਪਰੇ ਰੱਖ ਰੰਨਾ ਨਾ ਵੀ ਸਵਾਰ ਵੀ ਜਲਦੀ ਚੀਣੀ ਲੱਗਦੀ ਚੀਨ ਤਾਂ ਦੇਖਣ ਨੂੰ ਨਹੀਂ ਸੀ ਨਾ ਸਰੀਰ ਤੇ ਮਾਲਗੂਰੂ ਬਤਾਵੇ ਕਿ ਆ ਜੀਨ ਪੜੀ ਹੈ ਐ ਜੀਨ ਉਹਨੂੰ ਕਦਾਂ ਸਾਨੂੰ ਤੇ ਉਹਦਾ ਕਾਹਦੇ ਮਾਲਗੂਰੂ ਬਤਾਵੇ ਜੀਪੰਦਾ ਸਾਨੂੰ ਵੀ ਬਤਾਵੇ ਨੌਕਰੂ ਬੁਰਾ ਨੌਕਰ ਚੱਕੇ ਸੰਕੇਜ ਪਾਣੀ ਪਾ ਦੂਗਾ ਕੋਟਾ ਰੇਡੀਏਟਰ ਪਾ ਦੂਗਾ ਉਹ ਵੀ ਬਦਲ ਤੇ ਤਕੀਬੰਦ ਬਾਣੀ ਸਾਰ ਬ੍ਰਹਮ ਕੇ ਸਗਲੇ ਥਾਉ ਜਿਹੜੇ ਸਾਰ ਬ੍ਰਹਮ ਕੇ ਸਗਲੇ ਥਾਉ ਜਿਹਦੇ ਹਿੱਸੇ ਨੇ ਸਾਰੇ ਪਾਰ ਬ੍ਰਹਮ ਦੇ ਨੇ ਉਹ ਪਾਰ ਬ੍ਰਹਮ ਉੱਤੇ ਹੈਗਾ ਉਹਦੀ ਆਵਾਜ਼ ਉੱਤੇ ਹੈਗੀ ਹੈ ਉਹ ਇਨਸਾਨ ਦੀ ਆਵਾਜ਼ ਹੈ ਇਨਸਾਨ ਪਰਮ ਦੀ ਆਵਾਜ਼ ਨਾਲ ਜੁੜਿਆ ਹੋਇਆ ਹੈ ਇਨਸਾਨ ਉੱਥੇ ਬੈਠਾ ਹੈ ਵਿੱਚ ਉਹਦੀ ਆਵਾਜ਼ ਦੀ ਗਾਹ ਤੋਂ ਜਦਾ ਵੀ ਆ ਰਹਿਣਾ ਕਰ ਐਨਾ ਕਰੂ ਕਿ ਸੁਣਦਾ ਕੌਣਾ ਤੜਾ ਪਾਣੀ ਵਾਹ ਬਹੁਤ ਕਹਿੰਦੇ ਸਾਰੇ ਨੇ ਮੰਨਦੇ ਸਾਡੇ ਵੀ ਉੱਤਰ ਆਤਮ ਦੀ ਆਵਾਜ਼ ਹੁੰਦੀ ਹੈ ਬੇਕ ਆਵਾਜ਼ ਐਡੀ ਹੁੰਦੀ ਹੈ ਪਰ ਉਹ ਆਵਾਜ਼ ਅਨਸਾਰ ਕਾਬੂ ਨਹੀਂ ਕਰਦੇ ਸ਼ੈਤਾਨ ਨੇ ਸ਼ੈਤਾਨ ਜੁੱਗ ਜਿਹੀ ਲੱਗਦੀ ਹੈ ਇੱਕੋ ਇੱਕਲਾ ਨੁਕਤਾ ਹੈ ਸਾਰੀ ਬਰਦ ਠੀਕ ਹੋ ਸਕਦੀ ਹੈ ਸਾਰੇ ਮਸਲੇ ਹੱਲ ਨੇ ਸ਼ੈਤਾਨ ਜਿਹੜਾ ਹੈਗਾ ਉਹ ਸਾਰੇ ਕਲਾ ਦਾ ਗੂੜ ਹੈ ਤੇਰਾ ਜਿੱਤੇ ਕਲਕਲੇਸ਼ ਹੈ ਜਿੱਤੇ ਫਸਾਦ ਲੜਾਈ ਝਗੜੇ ਨੇ ਦੁਨੀਆ ਦੇ ਵਿੱਚ ਜਿੱਤੇ ਖੋਖਚਾ ਜੋ ਵੀ ਅਪਰਾਧ ਹੈ ਸ਼ਤਾਨ ਦੀ ਉਪਜ ਕਾ ਤਾਂ ਦੇ ਦਿਮਾਗ ਦੀ ਉਪਜ ਸਾਹਿਬਾ ਕਹੇ ਕਹੇ ਕੋਣ ਮਨੇ ਕੋਣ ਮਨੇ ਕੋਣ ਹਾਂਜੀ ਜਿੱਦ ਜਿੱਦ ਕਰ ਰੱਖੇ ਤੈਸਾ ਤੇਨੂੰ ਨਾ ਜੇ ਤਿੱਜੇ ਕਰ ਰੱਖੇ ਤੈਸਾ ਤੇਨੂੰ ਨਾ ਤੈਸਾ ਤੇਨੂੰ ਜਿਹੜੇ ਜਣੇ ਘਰ ਚ ਜਿਹੜੇ ਜਣੇ ਜੀਵ ਨੂੰ ਰੱਖਿਆ ਉਹ ਜਿਹੜਾ ਅੰਦਰ ਜਿਹੜੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਮੈਂ ਤੱਕ ਦਾ ਇਹ ਕਾਲਜ ਇੱਕੋ ਜਗਾ ਸਭ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਗ੍ਰਾਮੀਣ ਵਾਲੀ ਸਿੱਖਿਆ ਦੇਣੀ ਕੋਉਗੀ ਪਹਿਲੇ ਵਾਲੇ ਨੂੰ ਦੂਜੇ ਵਾਲੇ ਨੂੰ ਦੂਜੀ ਤੀਜੀ ਵਾਲੇ ਨੂੰ ਤੀਜੀ ਉਹਨਾਂ ਦੇ ਸਾਹਮਣੇ ਸਿੱਖਾ ਦੇਣੀ ਕੋਉਗੀ ਕੰਟਰੋਲ ਲਾ ਕੇ ਕਿ ਰਸੀ ਜਿਹੜੇ ਘਰ ਵੀ ਜਿਹੜਾ ਪਿਆ ਜੀਵ ਉਹ ਆਉਂਦੇ ਉਥੇ ਕਹਿੰਦੇ ਆ ਸਾਰੇ ਘਰ ਉਹਦੇ ਸਾਰੇ ਗੁਰੂ ਸਾਰੇ ਗੁਰੂਆ ਜਿਨੀ ਜਿਹਦੇ ਨੂੰ ਜਿਤੇ ਦੀ ਸਾਰੇ ਸਾਰੇ ਤੇਲੇ ਪ੍ਰਵਾਨ ਕੀਤੇ ਗੁਰੂ ਸਾਰੰਗ ਤੇਲੇ ਪ੍ਰਵਾਨ ਕੀਤੇ ਬਹੁਤ ਚੰਗਾ ਹੈ ਤੀਰੀ ਜਿਹਲੇ ਦਾ ਜਿਨੀ ਉਹ ਬੁਢੀ ਤੇ ਵੀ ਆਹ ਜਿਹਲੇ ਲਿਖਿਆ ਹੋਇਆ ਉਹ ਬੁਜਾਣਾ ਇਹਨੂੰ ਸਿਆਰੀ ਆ ਨਾ ਸਿਆਰੀਆ ਜਿਆਦੀ ਤੂੰ ਵੀ ਦੇ ਤਾਨੂੰ ਫੇਟੋ ਵੀ ਦੁਨੀਆ ਨੂੰ ਹਟਾ ਦੋ ਚੰਕਾ ਲਓ ਜਿਨੀ ਨਾ ਕਰੋ ਸਾਰੀ ਉਡਾ ਦੋ ਪਰ ਅੱਗੇ ਚੇਲੇ ਲਾ ਬੰਨ੍ਹਿਆ ਹੋਇਆ ਨੂੰ ਕਹੋ ਚੱਲੂ ਤੂੰ ਜੋ ਪਾਰ ਬ੍ਰਹਮ ਕੇ ਸਗਲੇ ਠਾਉ ਜਿੱਦ ਜਿੱਦ ਕਰ ਰਾਖੇ ਤੈਸਾ ਤੈਨੂੰ ਹੋਰ ਆਦਮੀ ਦੇ ਜਨਮ ਦੇ ਵਿੱਚ ਹੋਰ ਕੰਦਨ ਆਦਮੇ ਨੇ ਵੀ ਗਾਂ ਚੜੀਆਂ ਨੇ ਗਾਂ ਆਦਮੇ ਨੇ ਵੀ ਚੜੀਆਂ ਚਲੋ ਇਹ ਆਦਮਿਆਂ ਦੀ ਸ਼੍ਰੇਣੀ ਦੇ ਵਿੱਚ ਆਪਾਂ ਇਹਨੂੰ ਲੈ ਲੈਂਦੇ ਹਾਂ ਲੈ ਕੱਲੀ। ਹਾਇ ਤਾਂ ਦੁਆ ਕਰਾਂ ਦੀ ਵੀ ਗੱਲ ਵਿੱਚ ਦੀ। ਆਦਮੀ ਦੇ ਥੱਕੀ ਤੋਂ ਕਾ ਆਦਮ ਨੂੰ ਦੇਸ ਦੇ ਵੀ ਵੱਖਰੇ ਵੱਖਰੇ ਘਰ ਗੋ ਬੱਕਰੀ ਨੂੰ ਬੱਕਰੀ ਨੂੰ ਸਪੈ ਜਾਣਦੇ। ਬੱਕਰੀਆਂ-ਬੱਕਰੀਆਂ ਆਦਮੀ ਦੀ। ਪੜ ਕਿ ਇਹਨੂੰ ਕਿੱਥੋਂ ਨਾ ਬੁੱਲੋ ਤੇਰਾ ਕਿੱਥੇ ਲੈ ਜਾਣਾ ਹਾਂ ਇੱਥੇ ਚੱਲਣਾ ਪੂ ਹਾਂਜੀ ਆਪੇ ਕਰਨ ਕਰਾਵਣ ਜੋਗ ਉਹ ਜਿਹਨੂੰ ਗਿਆਨ ਦੇਣਾ ਜਿਹੜੀ ਕਲਾਜ ਪੜਦਾ ਉਹਦਾ ਹੀ ਗਿਆਨ ਹਾਂਜੀ ਆਪੇ ਕਰਨ ਕਰਾਵਣ ਜੋਗ ਪ੍ਰਭੂ ਆਵੇ ਸੋਈ ਫਲ ਹੋਊਗਾ ਆਪੇ ਕਰਨ ਕਰਾਵਣ ਜੋਗ ਜੋ ਸੱਤੋਂ ਵੀ ਕਰਾਉਂਦਾ ਹੈ 그러면은 ਕਹੇ ਸੱਤੋਂ ਨਾ ਉਹ ਜੇ ਸਮਝ ਰੱਖਾ ਹੈ ਕਿ ਜੋ ਨਾ ਕਰਨਾ ਹੋਇਆ ਸਤਿਗ੍ਰਹ ਨਾ ਕਰ। ਕਰਨ ਕਰਾਮਾ ਜੋ ਹੋਗਾ। ਪ੍ਰਭੂ ਆਪਣੀ ਦਾਤਾ ਉਹ ਹੀ ਹੈ ਜੋ ਦੀ ਰਜ਼ਾ ਮਰਜੀ ਹੈ। ਪਰ ਸਤਿ ਕਰਵਾ ਲੈਣਾ ਹੈ ਇਹ ਵਿੱਚ ਸਪੱਸ਼ਟ ਹੈ ਕਿ ਉਹ ਕਿਉਂ ਹੈ। ਕਰਾਮਾ ਜੋ ਹੋਗਾ। ਕਰਾਮਾ ਜੋ ਹੋਗਾ ਉਹ ਦੇ ਕਰਾਮਾ થાય ਸਾਡੇ ਜਿਹੜੀ ਨਜ਼ਰਾਂ। ਸਾਨੂੰ ਤਾਂ ਜਾਣਦੇ ਆਂ ਅਸੀਂ ਕਰਦੇ। ਕਈ ਵਾਰ ਸਾਡੇ ਜੇ ਫੁਰਨਾ ਹੁੰਦਾ ਵੀ ਆ ਕਮਾਏ ਕਰਕੇ। ਹਦਈਏ ਪਰਨੇ ਫੋਟ ਨਾਲ ਉਹਦਾ ਹੀ ਥਾਲਿਆ ਹੁੰਦਾ ਫੋਟ ਨਾਲ ਕਿਧੋਂ ਹੁੰਦਾ ਇਹ ਵੀ ਪਤਾ ਆਇਆ ਹੋਇਆ ਆਪਣਾ ਕਿਉਂ ਆਇਆ ਇਹਦਾ ਜੀ ਬਾਬੀ ਉਹਨੇ ਕਿਉਂ ਆਇਆ ਇਹਦਾ ਜੀ ਬਾਬੀ ਇਹ ਤਾਂ ਹੀ ਪਤਾ ਨਹੀਂ ਉਹਨੇ ਕਿਉਂ ਉਹਦਾ ਹੀ ਜਾਂ ਬੇਕਾਰ ਮਾਂ ਪਾਂਣ ਜਦ ਤੱਕ ਅਮੀ ਟੁੱਟੀ ਤਾਂ ਆਏਗਾ ਜੇ ਤੈਨੂੰ ਤੇ ਛੜ ਦਿੰਦੇ ਉਹ ਬੇਟਾ ਮਾਂ ਛੜ ਭਲਾ ਦੇਖਾਂ ਮਰਾ ਟੁੱਟੀ ਨਾਲ ਜਦ ਲਈ ਆਏਗਾ ਉਹ ਤਾਂ ਜੇ ਛੱਡੂ ਜੇ ਰਿਆ ਜਾਨ ਹਾਂ ਆਪੇ ਕਰਨ ਕਰਾਵਣ ਜੋਗ ਪਰਮ ਭਾਵੇ ਸੋਈ ਪਨ ਹੋਊਗਾ ਪਰ ਆਪ ਜਦ ਇੱਛਾ ਪ੍ਰਾਪਤੀ ਉਦੇਪਾ ਹੁੰਦਾ ਹੈ ਉਹ ਤਾਂ ਜਦੇ ਹੋ ਜਾਂਦਾ ਹਾਂ ਜਦ ਹੀ ਹੋ ਜਾਂਦਾ ਉਹ ਟਾਈਮ ਦੇ ਵਿੱਚ ਫਿਰ ਤਾਂ ਕੋਈ ਰੌਲਾ ਪਾ ਲੈਣਗੇ ਆ ਨਹੀਂ ਆਗਾ ਵੀ ਉੱਥੇ ਜੀ ਪਾਰਲੀਮੈਂਟ ਦਾ ਉਹ ਪਾਸ ਕਰੋ ਤਾਂ ਬੇ ਰੌਲਾ ਪਾ ਜੇ ਉਹ ਤਾਂ ਆਪੇ ਹੀ ਨਿਕਲਦਾ ਵੀ ਗੱਲ ਕੀ ਹੈ ਬਾ ਜਿਹੜਾ ਕੰਮ ਵਾਲਾ ਡਿਕਲੇਅਰ ਕੀਤਾ ਜਦ ਇਹ ਹੋ ਜਾਂਦਾ ਹੈ ਕਦੇ ਨਹੀਂ ਪਤਾ ਕਿ ਸੁਣ ਕੋ ਹੋ ਜਾਂਦਾ ਪ੍ਰਪ ਜਿਹੋ ਕੋ ਉੱਤੇ ਹੋਇਆ ਜੋ ਗ੍ਰਾਮੂਪ ਜੋ ਪ੍ਰੋਬਲਮ ਛੱਡਦਾ ਜੋ ਗ੍ਰਾਮ ਜਾਂਦਾ ਕਸਰਿਓ ਆਪ ਹੋਏ ਜੀ ਨਾਮ ਦੇ ਪਾਸੇ ਇੱਕ ਵਾਰ ਸਾਡੇ ਅੰਦਰ ਵੀ ਬੈਠਾ ਹੈ ਉਹ ਪ੍ਰਭ ਦਾ ਪਾਣਾ ਇਹਦੇ ਇਹਦੇ ਕੋਲ ਹੁੰਦਾ ਮਨ ਉਹ ਤੇ ਕੋਲ ਹੁੰਦਾ ਪ੍ਰਭ ਕੋ ਉਹਦਾ ਇਹਦੀ ਅੰਤਰਰਾਸ਼ਟਰੀ ਉਹ ਇਥਾਨਾ ਚ ਆਪਣਾ ਬੰਦਾ ਨੂੰ ਬਿਠਾ ਰਿਆ ਉਹਦੇ ਉਹ ਬੰਦਾ ਉਠਾ ਰਿਆ ਤਾਂ ਉਹਨਾਂ ਆਪਣਾ ਉਹਦੇ ਅੰਦਰ ਹੁੰਦਾ ਉਹ ਫਿਰ ਤੁਹਾਨੂੰ ਮੈਸੇਜ ਰੀਸਿਵ ਹੋਈ ਜਾਂਦਾ ਉਹਦੇ ਕੋਲੇ ਹੁੰਦਾ ਤੁਸੀਂ ਨਾਮ ਦਾ ਉਹ ਤੇ ਨਾਮ ਵਾਲਾ ਮੈਸੇਜ ਆਪ ਹੋਏ ਅਨੰਤ ਤਰੰਗ ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਫਸਿਰਿਓ ਆਪ ਹੋਏ ਅਨੰਤ ਤਨੰਗ ਹਾਂ ਆਪ ਉਹ बस गया हुआ है अनंत तरंग ने अनेक प्रकार ਦੇ ਉਹਦੇ ਕੋਲ ਗਿਆਨ ਇੱਕੋ ਜਿਹਾ ਗਿਆਨ ਮਿਲਦਾ ਸਰੰਗਾਂ ਦਾ ਕੋਈ ਨਹੀਂ ਫੁਰਮੇ ਰਹੇ ਹਾਂ ਹਾਂ ਹਾਂ बस रहे हम ਦੀ तरंग है वो ਦੀ ਇੱਕੋ ਪ੍ਰਕਾਰ ਦੇ ਕੰਮ ਅਸੀਂ ਕਰਦੇ ਇੱਕੋ ਪ੍ਰਕਾਰ ਦਾ ਦੀ खोजਿਆ ਅਰਵਲੇ अनंत तरंग अनंत तरंग ਲਗੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਹੈ ਉਹਦਾ ਹੈ ਜਿੱਤੇ ਜਹਦੀ ਜੀ ਦੀ ਲੋੜ ਉਹਨੇ ਜੈ ਜੀ ਤੇ ਕੱਪਰੋਂ ਉਹਦੇ ਉੱਪਰ ਹੋ ਜੇ ਕੋਲੋਂ ਲਗੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਇਸ ਕਰਕੇ ਜਿਹੜੇ ਪਾਰ ਬ੍ਰਹਮ ਦੇ ਰੰਗ ਨੇ ਲੋ ਜਿਹੜਾ ਰੰਗ ਨਹੀਂ ਕੋ ਰੰਗ ਦੀ ਹੈ ਜਿਹੜਾ ਅੰਤ ਰੰਗ ਨੇ ਬੇਅੰਤ ਰੰਗ ਨੇ ਜਿਹੜੇ ਉਹਦੇ ਉਹ ਨਹੀਂ ਤੂੰ ਸਮਝ ਬੇਸ ਪ੍ਰਕਾਲ ਦਾ ਗਿਆਨ ਹੈ ਸਾਡੇ ਕੰਮ ਚ ਰੋਣਾ ਹੈ ਕੋਈ ਚੇਲਾ ਆਇਆ ਹੋਇਆ ਕੋਈ ਸਾਥੇ ਲੈ ਆਇਆ ਕੋਈ ਸਾਥੇ ਦਾਇਆ ਕੋਈ ਸਾਥੇ ਕੰਮ ਅਲਟੀ ਨਹੀਂ ਚੱਲਦਾ ਕੰਮ ਜੱਲ ਜੇ ਕੋ ਫੈਸਲਾ ਨਾ ਆ ਹਾਲਾਂਕਿ ਜੀ ਜਗਰ ਦੇ ਦਾ ਕੰਮ ਦਾ ਕੋਈ ਸ਼ੱਸਦਾ ਹਾਂਜੀ ਜੈਸੀ ਮਤ ਦੇ ਤੈਸਾ ਪ੍ਰਗਾਸ ਬਾਹਰ ਬ੍ਰਹਮ ਕਰਤਾ ਅਵਿਨਾਸ਼ ਜੈਸੀ ਕਿ ਹੋ ਜਾਂਦਾ ਹੈ ਉਹ ਵਾਸਤੇ ਜੋ ਪ੍ਰਗਾਸ ਹੋ ਰਿਹਾ ਹੈ ਉਹ ਮਤੋਂ ਉਤੋਂ ਜੈਸੀ ਮਤ ਦੇ ਤੈਸਾ ਪ੍ਰਗਾਸ ਕੋਈ ਕਿਸੇ ਦੇ ਅੰਦਰ ਕੋਈ ਪਾਸਾ ਨੂੰ ਕਰਤਾ ਅਵਿਨਾਸ਼ ਕੋਈ ਕੋਈ ਚੀਜ਼ ਪੜਦਾ ਜੋ ਪੜਦਾ ਹੈ ਉਹ ਪੜ ਵੀ ਉਹ ਹੀ ਲਾਇਆ ਜਾਂਦਾ ਰੂਜੀ ਉਹਦਾ ਰਾਹ ਨੂੰ ਬੂਲਾ ਪਾਸੇ ਕੋਲ ਕੇ ਜਲਾਇ ਸੁੱਕੇ ਚਲਾ ਹੈ ਹਾਂ ਤੇ ਤਰਮ ਨੇ ਦੋ ਉਹ ਉਹ ਹੀ ਕੰਮ ਆਦਾ ਹੈ ਹਾਂਜੀ ਜੈਸੀ ਮਤ ਸਿ ਪੜਨੋਂ ਕਰਦਾ ਉਹਦਾ ਹਮੇਸ਼ਾ ਹੀ ਰਹਿੰਦਾ ਸੂਰ ਉਹਦਾ ਚੱਲਦਾ ਹੀ ਰਹਿੰਦਾ ਅੱਜ ਕਹਿੰਦੇ ਆਉਣ ਵਾਲੇ ਜਾਇਦਾ ਰਹਿੰਦੇ ਇਹਨਾਂ ਨੂੰ پتہ ਨਹੀਂ ਮੈਨੂੰ ਵੀ ਪਹਿਲੀ ਕਲਾਸ ਐਸੀ ਕੀਤੀ ਸੀ ਕੀ ਨਹੀਂ ਉਹਨੂੰ ਸਭ ਪਤਾ ਹੀ ਹੈ ਕਿਹਾ ਹੈ ਕਿਹੜੀ ਕਲਾਸ ਆ ਗਿਆ પાસ ਹੋ ਗਿਆ ਗੂਰਾਂ ਨੂੰ ਤਾਂ ਪਤਾ ਹੀ ਹੁੰਦਾ ਸੁਬੂਤਾ ਹੋਈ ਹੈ ਸੁਬੂਤਾ ਹੋਸੇ ਕਿਹਾ ਜਿਹੜਾ ਪੀਛੇ ਪਿਛਲੀ ਕਵਾਚ ਰਹਿ ਗਿਆ ਉਹ ਕਹਿੰਦਾ ਇਸ ਵਿੱਚ ਜਾਣੋ ਪਵਿਨਾਸ ਮਰਦਾ ਦੀ ਹੈ ਉਹ ਉਸ ਉਹਦਾ ਕੁਝ ਵੀ ਨਾਸ ਨਹੀਂ ਹੁਣ ਬੜਾ ਸਾਡਾ ਤਾਂ ਸਰੀਰ ਬਾਹਰ ਨਾਸ ਹੋ ਜਾਂਦਾ ਨਾ ਕੰਨਾਂ ਦੀ ਸੁਣਨ ਸ਼ਕਤੀ ਨਾਸ ਹੋ ਜਾਂਦੀ ਹੈ ਅੱਖਾਂ ਦੀ ਦੇਖਣ ਸ਼ਕਤੀ ਨਾਸ ਹੋ ਜਾਂਦੀ ਹੈ ਉਦਦਾ ਬਲ ਘਟ ਜਾਂਦਾ ਹੈ ਘਟ ਜਾਂਦਾ ਨਾਸ ਨਹੀਂ ਹੁੰਦਾ ਹਾਂ ਉਹ વિનાਸ਼ ਹੈ ਉਹ ਨਾਸ਼ੀ ਕਰਦਾ ਉਹ ਲਗਾਤਾਰ ਉਹ ਉਦਦਾ ਟੀਚਰ ਆ ਪਈ ਹੈ ਇਹ ਜਿਹੜਾ ਸਕੂਲ ਹੈ ਪੜ੍ਹਾਈ ਦਾ ਇਹਦਾ ਟੀਚਰ ਉਹ ਆ ਪਈ ਹੈ ਗੁਰੂ ਆ ਪਈ ਹੈ ਸਾਰਾ ਮਾਮਲਾ ਕਿ ਕਾਇ ਵਾਰ ਫੇਰ ਹੋ ਚੁੱਕਿਆ ਉਹ ਤਾਂ ਪਤਾ ਹੀ ਹੈ ਲੈ ਕਿਹੜਾ ਨਰਾਇਣ ਕਿਹੜਾ ਸੱਪਾ ਕਾ ਉਹ ਇਹ ਕਰਦਾ ਰਹਿੰਦਾ ਬਦਲ ਬਦਲ ਕੇ ਵੇਰਕ ਵਿਪਲਕ ਮੇਰਾ ਧੀ ਬਣਾਇਆ ਉਹ ਤਾਂ ਕੋਸ਼ ਕਰਦਾ ਹੈ ਤਿਆਗੋ ਫਿਰ ਬੋਲਦਾ ਇਹ ਕਿ ਜੂੜ ਰਹਿ ਗਿਆ ਲੈ ਲੈ ਲੈ ਆਪ ਵਰਦਾ ਜਾ ਉਹਦੇ ਹੁਕਮ ਨਾ ਬਣਦਾ ਆਪਣਾ ਹੋਂਦ ਨਹੀਂ ਹੈ ਇਹ ਕੱਟਦਾ ਮੈਂ ਤੁਹਾਨੂੰ ਇਹ ਦੱਸਦਾ ਉਹ ਕਹਿੰਦੇ ਸਾਡਾ ਨਾ ਬੜਾ ਸਾਰੇ ਬ੍ਰਹਮਣ ਇਕੋ ਜਿਹੇ ਸਾਰੇ ਬਰਾਬਰ ਦੇ ਮਹਾ ਮੋਠਾ ਨਾ ਛੋਟਾ ਵੀ ਕੋਈ ਹੁੰਦਾ ਜੋ ਮਹਾਨ ਹੈ ਤਾਂ ਮੋਢ ਨੇ ਫਰਕ ਤਾਂ ਇਹ ਨਹੀਂ ਆ ਉਹ ਮਹਾਨ ਦਾ ਥੋੜੇ ਜਿਹਾ ਨੇ ਕੀ ਵਰਕਤ ਫਰਕ ਵਰ ਕੋਈ ਨਹੀਂ ਹੈਗਾ ਫਰਕ ਆਪਣੇ ਉਹ ਹੈ ਤੇ ਲੈ ਕੀ ਦਾ ਫਰਕ ਹੈ ਜਦ ਦੁੱਖ ਆਲ ਸੁੱਖ ਨਹੀਂ ਨੀ ਮੋਰ ਕੋ ਜਬੀ ਜਾਦਾ ਹੁੰਦਾ ਜਿਹੜੇ ਟੈਕ ਹੁੰਦਾ ਜਿਆਦਾ ਬਾਹਰ ਜਾਣਾ ਚਾਹੁੰਦਾ ਇਤੋਂ ਸੰਸਾਰ ਦਾ ਦੁਬੀ ਹੁੰਦਾ ਸੁਆਪ ਪਰਚੀ ਬਾਹਰ ਜਾਣਾ ਹੀ ਚਾਹੁੰਦਾ ਸਭ ਕੰਦਾ ਬਾਹਰ ਇੱਥੇ ਆ ਕੇ ਫਿਰ ਕੁਝ ਨਹੀਂ ਜਦ ਫੇਰ ਹੋ ਜਾਂਦਾ ਬਹੁਤ ਪਛਤਾਉਂਦਾ ਵੀ ਐਤ ਇਹ ਗਲਤੀ ਵੀ ਕਰਦੀ ਆ ਥੋੜਿਆ ਦੋ ਕੁ ਮਹੀਨੇ ਦੀ ਛੁੱਟੀਆਂ ਦੇ ਬਾਅਦ ਫੇਰ ਹੋ ਜਾਈ ਕਮਜ਼ੋਰ ਥੋੜੇ ਦਿਨ ਪੈਸਾ ਉਹਨੇ ਭੇਜੋ ਕੇ ਫੇਰ ਬਰਜਾ ਤਾ ਫੇਰ ਕੋਲ ਜਾਂਦਾ ਉਹ ਹੀ ਕੰਮ ਫੇਰ ਫੇਰ ਵੇਲੋ ਜਾਂਦਾ ਥੋੜੇ ਦਿਨ ਕੋਈ ਤੌਜ਼ਾ ਤੇ ਤੇਜ਼ ਪੈਸਾ ਜਾ ਕੇ ਵਰ ਜਾਂਦਾ ਆਇਆ ਜਾ ਕੇ ਵਰ ਜਾਂਦਾ ਉਹ ਟਾਪਰ ਤੋਂ ਕਹਿੰਦਾ ਹਾਂ ਦੋਰ ਪਰਤਾ ਜੋ ਉਤਾਰ ਲਈ ਇੰਸਾਨ ਸਕੂਲ ਦੇ ਜਾਲੂਜੇ ਨੋਏ ਤਵਾਰੇ ਕੋਸੇ ਨਾ ਆਇਆ ਉੱਤੇ ਤੋਂ ਜਾਲਦਾ ਇੰਸਾਨ ਥੋੜਾ ਜਾ ਮੈਂ ਥੋੜਾ ਅੱਗੇ ਰੇ ਫੇਲ ਹੋਏ ਤੇ ਬਾਹਰ ਲੜਦਾ ਆ ਗਿਆ ਸਕੂਲ ਗੁਜ਼ਰ ਦੁਨਿਆਕਲਾ ਸੰਖਿਆ ਜਾਲੂਜੇ ਉਹ ਉਹ ਹੀ ਆ ਗਰਬਦਾ ਅੱਗੇ ਤੋਂ ਕਰੂਗਾ ਚਲ ਸਕੂਲ ਖੋਲਣਾ ਤੇ ਜਾਲੂ ਬੋਲਣਾ ਫਿਰ ਉਹਦੇ ਬਾਅਦ ਸਕੂਲ ਬਾਅਦੇ ਖੋਲਣਾ ਉਹ ਉਦੀ ਪੜਾਏ ਨਾ ਉਹਨੇ ਤੇ ਚੱਲਨੀ ਬਾਸ ਉਹਦੇ ਉਹਦੇ ਪੜਾਏ ਤੇ ਖੋਲ ਦੇਈ ਜਾਂਦਾ ਸਦਾ ਸਦਾ ਸਦਾ ਦਿਵਾਲ ਸਿਮਰ ਸਿਮਰ ਨਾਨਕ ਭੈ ਲਿਹਾ ਜਿਹੜਾ ਅਬਨਾਸ਼ੀ ਹੈ ਅਬਨਾਸ਼ੀ ਹੈ ਜਿਹੜਾ ਉਹ ਸਦਾ ਸਦਾ ਰਹਿਣ ਵਾਲਾ ਹੈ ਉਹ ਸਦਾ ਹੀ ਦਿਵਾਲ ਹੈ ਕਦੇ ਵੀ ਉਹਦੇ ਦਿਹਾੜ ਜਦ ਦਿਚ ਚੜ੍ਹ ਫਰਕ ਨਹੀਂ ਆਇਆ ਇਹਦਾ ਇਲਾਜ ਵੀ ਕਰਨਾ ਡਾਕਟਰ ਆਹੋ ਇਹ ਬਰੀਜ ਹੈ ਇਮਰੀ ਨੂੰ ਠੀਕ ਕਰਕੇ ਘਰ ਦੇ ਨੂੰ ਆਪਣੇ ਘਰ ਨੂੰ ਜਾ ਬਈ ਉਹ ਤਾਂ ਇਹੀ ਇੱਛਾ ਰੱਖਦਾ ਸਦਾ ਹੀ ਦੇ ਆਲਾ ਇਹ ਆਪਣੀਆਂ ਗਲਤੀਆਂ ਨਾਲ ਆਪਣੇ ਪਰਹੇਜ ਨਹੀਂ ਰੱਖਦਾ ਉਹ ਚੀਜ਼ਾਂ ਖਾ ਲੈਂਦਾ ਜਿਹੜੀਆਂ ਗਿਆ ਨਾ ਖਾਇਆ ਕਰ ਪਰਹੇਜ ਨਹੀਂ ਰੱਖਦਾ ਇਸ ਕਰਕੇ ਦਵਾਈ ਬਿਊਟੀ ਘਾਲਨ ਦਾ ਜਿਹੜੀ ਦਵਾਈ ਕਹੀਆ ਲੋਕੀ ਉਹ ਦਵਾਈ ਉਹ ਡੁਪਲੀਕੇਟ ਗਈ ਜਾਂਦਾ ਜੇ ਡੁਪਲੀਕੇਟ ਦਾਸੀ ਹੋਈ ਜਾਂ ਜਾਂਦੇ ਪਹਿਲਾਂ ਨਾਮ ਬਾਰੇ ਡੁਪਲੀਕੇਸੀ ਹੈ ਤਾਂ ਬਾਰੇ ਡੁਪਲੀਕੇਸੀ ਹੈ ਅਲੱਜ ਦਵਾ ਹੋਵੇਗੇ ਤਾਂ ਸਾਰਾ ਫਾਰਮੂਲਾ ਹੀ ਡੁਪਲੀਕੇਟ ਹੈ ਫਾਰਮੂਲੇ ਦਾ ਟੋਟਲ ਫਾਰਮੂਲਾ ਹੀ ਡੁਪਲੀਕੇਟ ਹੋ ਗੁੱਟ ਟਾਈਮ ਨੂੰ ਪਤਾ ਨਹੀਂ ਡੁਪਲੀਕੇਟ ਹੋ ਮੰਨ ਚੱਬ ਮਾਤਮ ਜੀ ਅੰਕੜਾ ਵਾਲਿਆਂ ਨੂੰ ਪਤਾ ਪਾਣਾ ਤਾਂ ਮੈਨੂੰ ਜਿ ਕਰਨ ਲੱਗਦਾ ਪਾਣਾ ਮਨੂ ਨਹੀਂ ਜੱਬਾ ਲੱਗਦਾੁਰ ਕੀ ਮਨੂ ਪਾਣਾ ਜੇ ਕਿਹਾ ਲੱਗਦਾ ਹੁੰਦਾ ਤਾਂ ਉੱਥੋਂ ਹੀ ਕਿਉਂ ਲਾਇਥੇ ਬਿਰ ਪਾਣਾ ਮੰਨਣ ਚਾਹਿਆ ਆਪਣੇ ਪਾਣੀ ਜਲਣਾ ਚਾਹੁੰਦਾ ਸੀ ਮੇਰੀ ਇਸਲਾ ਬਤੂ ਮਾਂ ਘੜੀ ਹੋ ਗਈ ਯਾਰ ਐਂਜੋਟ ਨਹੀਂ ਹੋਗਾ ਕੋਈ ਸਲਾਹ ਕਰ ਤੇ ਹਟ ਗਿਆ ਸਲਾਹ ਕਰ ਤੇ ਹਟ ਗਿਆ ਆਰਡਰ ਦੇ ਨਾ ਤੇ ਹੋਰ ਜਨਸੀ ਅਰਦਾਸ ਕਰਦੇ ਨਾ ਅਰਦਾਸ ਕਰਦੇ ਹਟ ਰੋਈ ਆ ਤੈਨੂੰ ਪਈ ਹੋਈ ਕਹਤਾ ਅਰਦਾਸ ਵੀ ਹੁਕਮ ਚ ਕਰਦਾ ਜਿਹੜੀ ਅਦਾਸ ਗੱਲਿਓ ਜੋ ਹੁਕਮ ਬਾੜ ਲਿਆ ਨੇ ਹੁਕਮ ਪੜੇ ਇਹਨੂੰ ਕੋសារੇ ਹੁਕਮ ਹੀ ਬਾੜਿਆ ਅਦਾਸ ਤੇ ਮੀਣਿਆਂ ਦੀ ਅਦਾਸ ਗੁਰੂ ਦੇ ਰਸਨੀਆ ਜਿਹੜੀ ਚੱਲਦੀ ਹੈ ਤੁੰਤਾ ਹੈ ਜਿਹੜੀ ਅਦਾਸ ਤੂੰ ਉਠਾ ਕੇ ਤੁੰਕਾ ਅਦਾਸ ਜਿਉਂ ਪੰਦਰ ਤੇ ਅਦਾਸ ਜਿਹੜੀ ਤੇਰੀਓ ਰਾਸ ਨਹੀਂ ਜਿਉਂ ਪੈਡੋ ਫਿਰ ਉਹਤੇ ਜਵਾਬ ਬੁਣ ਕਰਦੇ ਕੀ ਮਤਲਬ ਹੈ ਚਾਹੇ संपत्ति तुंडंती की रोड वे उधर जाके अखन तुंडंती की रोड वे उधर जाके बेटा शरीर तो हो जाई रहे ओना रखे जाए कान रखे दोनों काम लूला रखे जाए दमदा से तेरा ठेका लेवे तेंकल ना तो अपनी गल कर जेड़ा मेरा आत्मा को रोग आओ दूर होवे श्रीक तेंकिना फिर रासे ओदी है या रासे ओदी है ओ दुवेली रास कल ठेका लेवेगा ਉ ਆਪਣੀ ਜਿਹੜੀ ਤੇਰੀ ਰਾਸ ਨੂੰ ਠੀਕ ਕਰ। ਜਿਹੜਾ ਤੇਰੀਆਂ ਅੱਖਾਂ ਨੂੰ ਸੂਤੇ ਲੱਗਿਆ ਹੈ ਉਹ ਤਾਂ ਡੀਕਲ ਹੈ। ਉਹ ਦਾ ਵੀ ਬੋਤੀਆ ਉੱtre ਆਇਆ ਉਹਦਾ ਫਿਕਰ ਅੱਖਾਂ ਤੇ। ਬੋਤੀਆ ਦਾ ਲਾਲੀ ਕਰਦਾ ਸੂਤੇ ਦਾ ਵੀ ਕਰਦਾ। ਉਹ ਦਾ ਵੀ ਕਰਦਾ। ਅਕਲ ਵਾਲਾ ਜ਼ਿਆਦਾ ਹੈ। ਅਕਲ ਵਾਲਾ। ਉਹ ਦਾ ਫਿਕਰ ਹੈ। ਬੋਤੀਆ ਦਾ ਫਿਕਰ ਹੈ। ਉਹਦਾ ਫਿਕਰ ਹੈ ਉਹੀ ਆਪਣੀ ਅੱਖ ਉਹਦਾ ਫਿਕਰ ਨਹੀਂ ਬਗਾਨੀ ਜਿਹੜੀ ਅੱਖ ਐਨਕ ਦਾ ਫਿਕਰ ਹੈ ਉਹ ਡੇਲੇ ਦਾ ਫਿਕਰ ਹੈ ਜੀ ਦੇਦਾ ਜਾਏ ਫੁੱਟ ਜਾਏ ਐਨਕਾ ਫੁੱਟੇ ਤੂੰ ਐਨਕ ਦੇ ਦਸ ਕੀ ਲੈਣਾ ਡੇਲੇ ਦਾ ਉਹ ਜਿਹੜੇ ਅੱਖ ਦੇਖਣ ਵਾਲੀ ਉਹਦਾ ਤੇਰੀ ਫੁੱਟ ਗਈ ਤਾਂ ਐਨਕ ਦੇ ਕੀ ਲੈਣਾ ਇਹ ਐਨਕ ਚਾਈਦੀ ਹੈ ਫੇਜ਼ਮਾਪਰੇ ਅੱਖਾਂ ਤੋਂ ਰਹਿਣ ਜਾਏ ਹਾਂ ਐਨਕੀ ਜੀ ਮਾ ਜਿਆਦਾ ਵਾਏ ਅੱਖਾਂ ਦਾ ਐਨਕੇ ਸਾਡੀਆਂ ਐਨਕੈ ਨੇ ਬਾਹਲੀ ਅੱਖਾਂ ਆ ਦੂਈ ਤਾਂ ਕਿਤੇ ਐਨਕ ਲਾਈ ਹੋਈ ਹੈ ਹੋਰ ਉਹ ਵਾਲੀ ਐਨਕ ਦਾ ਐਨਕ ਤੇ ਉਹ ਐਨ ਖਰਾਬ ਹੋ ਗਈ ਖੋਲ ਲਾਤੀ ਤੇ ਕੁਝ ਫਰਕ ਪਿਆ ਨਹੀਂ ਜੀ ਉਹਦੀ ਕਮੀ ਪੂਰੀ ਕੀਤੀ ਐਨਕ ਦੀ ਬਾਹਲੀ ਦੀ ਅਸੀਂ ਨਹੀਂ ਪੈਂਦੀ ਉਹਦੀ ਹੋਰੀ ਜਿਹਦੀ ਕਦੇ ਪੈਂਦੀ ਉਹਨਾਂ ਨੇ ਨਭਾ ਗਏ ਉਦਯੋਗਾਂ ਵਿੱਚ ਬੁਰੀ ਜਿੱਤੇ ਆਉਣ ਕੇ ਨੈਤ ਸਭਾ ਲਿਓ ਇਹ ਜਿਨ੍ਹਾਂ ਦਾ ਫਿਕਰ ਹੈ ਹਾਂਜੀ ਸਦਾ ਸਦਾ ਸਦਾ ਦਿਵਾਲ ਸਿਮਰ ਸਿਮਰ ਮਾਨਕ ਭੈ ਸਦਾ ਸਦਾ ਸਦਾ ਦਿਵਾਲ ਸਦਾ ਹੀ ਦਿਵਾਲ ਆ ਸਦਾ ਸਦਾ ਰਹਿਣ ਵਾਲਾ ਜਦ ਦੁਆਰ ਆ ਸਦਾ ਸਦਾ ਸਦਾ ਦੁਆਰ ਆਇਆ ਸਦਾ ਸਦਾ ਆਤੋ ਅੰਤ ਤੱਕ ਰਹੂਗਾ ਸਦਾ ਸਦਾ ਦੋ ਵਾਰ ਆਤੋ ਅੰਤ ਤੱਕ ਰਹੂਗਾ ਸਦਾ ਜਦੋਂ ਤੱਕ ਜੀਵਨ ਸਾਥੀ ਹੈ ਜਦੋਂ ਤੱਕ ਹੈਂਗੀ ਰਹੂਗਾ ਸਦਾ ਸਦਾ ਔਰ ਤੇ ਇਹ ਦਰਾਂ ਤੇ ਦਿਆਲ ਵੀ ਸਦਾ ਹੀ ਰਹੂਗਾ ਜਿੰਨਾ ਜਰ ਰਹੂਗਾ ਦਿਆਲ ਹੀ ਰਹੂਗਾ ਕੁਛ ਵੀ ਦਿਆਲਤਾ ਚੋਦੀ ਚ ਫਰਕ ਨਹੀਂ ਪੈ ਸਕਦਾ ਕਦੀ ਨਹੀਂ ਆ ਸਕਦੀ ਜਿਹੜੀ ਯੂਫੇ ਦਾ ਹੀ ਨਹੀਂ ਗਾਂ ਨੂੰ ਵੀ ਗਰਤੀ ਦੇਤੀ ਨਹੀਂ ਆ ਸਕਦੀ ਇਹ ਵਿਆਲ ਆ ਵਿਆਲੂ ਲਖੂ ਗੁਰਮਖਾਨ ਦੇ ਵਾਸਾ ਕੜਿਆ ਆਮ ਲੋਕ ਤੇਲੂ ਨਹੀਂ ਬੰਦੇ ਰੱਬ ਦਾ ਰੋਜ ਅਗਰ ਅਕਬਰ ਸਾਹਿਬ ਨੇ ਕਹਿਰ ਕਰਦਾ ਨਿਕਾਲ ਤੋਰ ਦਾ ਦਰਮੀ ਦਾ ਵਿਆਲ ਕਿਥੇ ਸਾਢੇ ਸੋਚ ਬਿਤਾ ਉਹ ਧਿਆਨ ਲਈ ਤੇ ਗੁਰਮਖਾਨ ਨੇ ਸੋਚ ਬਿਤਾ ਉਹ ਵਿਆਲ ਹੈ ਸਦਾ ਸਦਾ ਸਦਾ ਦਿਆਲ ਸਦਾ ਦਿਆਲ ਵਾਜੀਦ ਇਹ ਸਬੰਧ ਕੀਤਾ ਸਿਮਰ ਸਿਮਰ ਮਾਨਕ ਭੈਣ ਨੇ ਉਹਨੇ ਇਹ ਬੰਦ ਕਰ ਦਿੱਤੇ ਨੇ ਜਿਹੜੇ ਇਹ ਜਿਨ੍ਹਾਂ ਦੇ ਅੰਦਰ ਗੱਲ ਮੰਨ ਲਈ ਸਿਮਰਤੀ ਚ ਰਹਿੰਦੀ ਹੈ ਤੇ ਸਦਾ ਸਦਾ ਦਿਆਲ ਹੀ ਹੈ ਉਹ ਜਿਹੜੇ ਇਹ ਗੱਲ ਯਾਦ ਰੱਖਦੇ ਨੇ ਮਨ ਤੋਂ ਬਸਾਰਦੇ ਨੇ ਜੋ ਬੁਝੀ ਦੁਨੀਆ ਕਰਹੀ ਆਈਏ ਉਹਨਾਂ ਹੋ ਜਾਂਦਾ ਨਾ ਨੇ ਵਾਰੀ ਉਹ ਕਰਿਆ ਨਮਰ ਜ਼ਮਰ ਜ਼ਮਰ ਨਾਨਕ ਭਏ ਨਿਹਾਲ ਹਾਲ ਉਹਨਾਂ ਵੀ ਚੱਨੇ ਵਾਲ ਲੱਗਿਆ ਹੋਇਆ ਉਹਨਾਂ ਦਾ ਲੱਗਾ ਆਦਮ ਚੱਨੇ ਕਾਲ ਉਹਨਾਂ ਵਾਲੇ ਚੱਨੇ ਕਾਲ ਲੱਗਿਆ ਆਦਮ ਆਹ ਜ਼ਮਰਦ ਨੇ ਜਿਹੜਾ ਆਹ ਜ਼ਮਰਦ ਜਿੱਤਨ ਨੂੰ ਕਹ ਤਾ ਉਹ ਕਹਿ ਕਰਤਾ ਬਾਗਏ ਉਦਨੇ ਗਏ ਇਹਨਾਂ ਮਰਦ ਬਿਸਮਰਤੀ ਹੋਈ ਜੇ ਤਾਂ ਬੋਲਦੇ ਹਾਂ ਹਾਂ ਭੁਰ ਕੇ ਬੋਲਦੇ ਹੈ ਬੋਲਦਾ ਕਿ ਉਹ ਯਾਰ ਗੱਲ ਜਿਆਦਾ ਲੱਗਦੀ ਹੈ ਕਹਿੰਦਾ ਯਾਰ ਮਦਦ ਯਾਰ ਨਾ ਮੋਟੇ ਮਨ ਮੁਕਤੀ ਵਾਲੀ ਰੋਕਾ ਇਹ ਗੱਲ ਦੀ ਪੈ ਨਹੀਂ ਰੱਖੀ ਹੋਈ ਨਹੀਂ ਜਾਣੀ ਸਿਮਰਨ ਭਗਤੀ ਹੈ ਸਿਮਰਨ ਭਗਤੀ ਹੈ ਜਪਣਾ ਭਗਤੀ ਨਹੀਂ ਹੈ ਜਪਣਾ ਸਮਝਣਾ ਸਭ ਜਿਹੜੇ ਬਾਤ ਪਕਤੀ ਸ਼ੁਰੂ ਹੋਣੀ ਹਉ ਆਇਆ ਜੰਗਲਿਆ ਹੁਣੇ ਉੱਪਰ ਆ ਪਕਟੀ ਰਹੇਗੀ ਜੇਮਨ ਤੋਂ ਬਸਦੀ ਰਹੂਗੀ ਜੇ ਜਮਨ ਹੈ ਤਾਂ ਬਕਤੀ ਹੈ ਜੇ ਜਮਨ ਬਸਦੀ ਹੋਗੀ ਤਾਂ ਬਕਤੀ ਗਈ ਕਹ ਰਾਜੀ ਹੋ ਭਕਤੀ ਵੀ ਹਾਜ਼ਰੀ ਸਮਨ ਤੇ ਵਿਚਾਰ ਰੱਖੀ ਹੋਈ ਕਿਰਿਆ ਯਾਰ ਰਖੋ ਸੇਮਾ ਦਾ ਸੇਮਾ ਦਾ ਸੁਪਰ